शलोक मोहल्ला पहला त्रै गितना का जीव्या जे लिख लिख बेचें नाव खेती जिनकी उजड़ै खलवाड़े क्या ठाऊं ग्रंथ और बेचदे सी ओना दा है किसे भी भारत दे अपनी कोई वाणी ਲੈ ਕੇ ਕੋਈ ਦੇ ਚੀਜ਼ ਉਹ ਗੁਰੂ ਗ੍ਰੰਥ ਸਾਹਿਬ ਗੁਰੂ ਘਰ ਤੋਂ ਵੇਚਿਆ ਹੋਵੇ ਇਹਦੀ ਹੋ ਸਕਦਾ ਉਹ ਵੀ ਅਸੀਂ ਪੇਟਾ ਲਿਖਿਆ ਹੋਇਆ ਉੱਥੇ ਉਹ ਜਿਹੜਾ ਖਰਚਾ ਹੁੰਦਾ ਉਹ ਸਮਝਾ ਲੈਂਦੇ ਨੇ ਉਹ ਵੇਚਦਾ ਨਹੀਂ ਉਹ ਨੂੰ ਵੇਚਣ ਕਹਿ ਸਕਦੇ ਕਿਤਾਬਾਂ ਨੇ ਕਿਹਾ ਤਾਂ ਰਾਇਟੀ ਬਗਲੇ ਤੇ ਰਾਇਟੀ ਸਾਡੂ ਉੱਡ ਜਾਈ ਦੀ ਉਹ ਵਿਦਵਾਨਾਂ ਦੀ ਗੱਲ ਹੈ ਤੇਗ ਬਿਨਾ ਕਾ ਜੀਵਿਆ ਜੇ ਲਿਖ ਲਿਖ ਵੇਚਿਆ ਦੋ ਵਿਦਵਾਨ ਲੈਵਲ ਦੀ ਗੱਲ ਸੀ ਖੇਤੀ ਜਿੰਦਗੀ ਉਜੜਾ ਜਿਹਨਾਂ ਦੀ ਖੇਤੀ ਉਜੜ ਗਈ ਜਿਹਨਾਂ ਨੇ ਇਸ ਨੂੰ ਪਰਮਾਰਥ ਨੂੰ ਫਾਰਥ ਬਣਾ ਲੈਣਾ ਟਰਬ ਨੂੰ ਧੱਦਾ ਬਣਾ ਲਿਆ ਲੇਕ ਲੇਕ ਦੋ ਵੇਚਣ ਦੀ ਜਨ ਲੈ ਉਹ ਤਾਂ ਖੇਤੀ ਉਂਝਣ ਵੀ ਅੰਦਰ ਹੀ ਖਲਵਾੜੇ ਦੇ ਲੋੜ ਹੈ ਨਾਲ ਕੀ ਲੈ ਕੇ ਜਾਣੇ ਖਲਵਾੜੇ ਜਿਹੜੀ ਚੀਜ਼ ਹੈ ਉਹ ਤਾਂ ਅੱਗੇ ਭੁੱਖਾ ਕਿਆ ਖਾਏ ਉਹੀ ਖਾਊਗਾ ਸੱਚੇ ਸ਼ਰਮੇ ਬਾਹਰੇ ਅੱਗੇ ਲਹਿਣਾ ਦਾਦ ਅਕਲ ਇਹ ਨਾ ਆਖੀਐ ਅਕਲ ਗਵਾਈਆਂ ਬਾਦ ਸੱਚੇ ਸਰਬੇ ਬਾਹਰੇ ਜਿਹੜੇ ਸੱਚੀ ਬਿਹਤ ਨਹੀਂ ਕਰਦੇ ਸੱਚੀ ਬਿਹਤ ਕੀ ਹੈ ਆਪ ਜਪਾ ਅਵਰਾ ਲੋਗ ਜਪਾਵੇ ਆਪ ਖੋਜ ਕਰੇ ਕੁਰਬਾਨੀ ਨੂੰ ਸਮਝੇ ਦੂਜਿਆਂ ਨੂੰ ਸਮਝਾਵੇ ਇਹ ਸੱਚੀ ਸਰਬ ਜਿਹੜੇ ਇਹ ਤੇ ਬਾਹਰੇ ਦੀ ਲੋ ਇਹਦੀ ਕੰਮ ਕਰ ਰਹੇ ਅੱਗੇ ਲੈਣਾ ਦਾਦ ਉਹ ਨੂੰ ਅੱਗੇ ਨਹੀਂ ਦਿੱਤਾ ਹੈ ਕਹੋ ਅੱਗੇ ਨਹੀਂ ਉਹਨਾਂ ਦੇ ਚਾਲੂ ਡੀ ਹੁੰਦਾ ਅੱਗੇ ਕਹਾਂ ਦਾ ਰਸਤਾ ਲੀਵੀ ਦਾ ਹੈ ਬੱਚੇ ਉੱਥੇ ਹੀ ਰਹਿ ਜਾ ਜਿੱਥੇ ਖੜੇ ਹੁੰਦੇ ਨੇ ਨਾ ਉਹ ਉੱਥੇ ਹੀ ਰਹਿ ਜਾਂਦੇ ਨੇ ਪਰ ਜੇ ਅਗਲੀ ਗੱਲ ਜਿਹੜੀ ਹੈ ਅਗਲੀ ਇਹ ਨਾ ਅੱਖੀ ਅਕਲ ਇਸ ਗੱਲ ਨੂੰ ਨਹੀਂ ਆਖਣਾ ਅਗਲ ਗਵਾਈਏ ਬਾਦ ਜੇ ਬਾਦ ਵਿਵਾਦ ਚ ਪੈ ਜਾਣ ਉਹ ਵਿਦਵਾਨ ਫਿਰ ਜਿਹੜੀ ਪਹਿਲੀ ਅਗਲ ਉਹ ਵੀ ਕੋਲ ਲੈਂਦੇ ਨੇ ਪਰ ਜੇ ਬਾਦ ਵਿਵਾਦ ਚ ਨਾ ਪੈ ਉਹਨਾਂ ਨੂੰ ਅੱਗੇ ਨਹੀਂ ਅਕਲ ਵਧੀ ਉੱਥੇ ਹੀ ਰਹਿ ਜਾਂਦੇ ਨੇ ਖੜੇ ਜੇ ਬਾਦ ਵਿਵਾਦ ਦਾ ਪੇਸ਼ਾ ਬਣਾ ਲੈਣ ਵਿਦਿਆਰਥੀ ਫਿਰ ਉਹ ਜਿਹੜੀ ਪਹਿਲੀ ਉਹ ਵੀ ਮਾਰੀ ਜਾਂਦੀ ਅਕਲ ਅਗਲੀ ਗਵਾਇਏ ਬਾਅਦ ਉਹ ਅਕਲ ਨਹੀਂ ਹੈ ਜਿਹੜੀ ਬਾਦ-ਬਾਦ ਚ ਪਵੇ ਗੁਰਮੁਖ ਕਦੇ ਪੈਸੇ ਦਾ ਪੇਸ਼ਾ ਨਹੀਂ ਬਣਾਉਂਦੇ ਗੁਰਬਾਣੀ ਪੈਸੇ ਦਾ ਪੇਸ਼ਾ ਨਹੀਂ ਹੈ ਗੁਰਬਾਣੀ ਵਿਚਾਰ ਦਾ ਵਿਸ਼ਾ ਧਰਮ ਵਿਚਾਰ ਦਾ ਵਿਸ਼ਾ ਹੈ ਤੁਹਾਨੂੰ ਦਾ ਪੇਸ਼ਾ ਨਹੀਂ ਹੈ ਜਿਹੜੇ ਤੁਹਾਨੂੰ ਪੈਸੇ ਦਾ ਪੇਸ਼ਾ ਬਣਾਉਂਦੇ ਨੇ ਉਹ ਅਕਲ ਉਹਨਾਂ ਨੇ ਬਾਦ-ਬਾਦ ਚ ਅਕਲ ਗਵਾ ਲਈ ਜਿਹੜੀ ਥੋੜੀ ਬਹੁਤੀ ਸੀ ਜੇ ਲੈ ਗਿਆ ਉਹ ਵੀ ਨਹੀਂ ਰਹੀ ਹੁਣ ਉਹਨਾਂ ਨੇ ਵਿਸ਼ਾ ਬਣਾ ਲਿਆ ਜਿਹੜੂ ਪ੍ਰੈਸਟੀਜ ਇਸ਼ੂ ਬਣਾ ਲਿਆ ਜਿਹੜੋ ਅਸੀਂ ਆਖ ਬੈਠੇ ਹੁਣ ਇੱਕ ਵਾਰ ਵਿਰੋਧ ਕਰ ਬੈਠੇ ਹੁਣ ਅਸੀਂ ਵਿਰੋਧ ਇਹ ਕਰਨਾ ਚਾਹੇ ਸਾਡੇ ਸਾਹਮਣੇ ਲਿਆ ਕੇ ਖੜਾ ਕਰ ਦੋ ਉਹ ਤੇਨੂੰ ਕੋੜਾ ਕਹਾਂਗੇ ਹਾਂਜੀ ਅਕਲੀ ਸਾਹਿਬ ਸੇਵੀਆਂ ਅਕਲੀ ਮਾਨ ਅਕਲੀ ਪੜ ਕੇ ਅਕਲੀ ਕੀਚੇ ਦਾਨ ਪਿੱਛੇ ਪੰਪਤੀ ਪੜ ਕੇ ਅਕਲੀ ਪੰਪਤੀ ਅਸਲ ਵਿੱਚ ਇਹ ਗੱਲ ਜੋਗੀ ਨੂੰ ਘਿਈ ਹੋਈ ਜੀ ਜੋਗੀ ਕਹਿੰਦਾ ਅਕਲ ਤੋਂ ਕਾਬੂ ਨਹੀਂ ਲੈਣਾ ਸਮਾਦ ਜਾਂ ਸੌ ਜਾਂਦੇ ਆ ਅਕਲ ਦਾ ਕਬਜ਼ੀਦਾਰ ਵੀ ਹੋਦੋਂ ਵਿਦਵਾਨ ਵੱਡਤ ਅਕਲ ਨੂੰ ਬਾਜਵਾਚ ਪਾਉਂਦਾ ਹੈ ਜੋਗੀ ਅਕਲ ਹੀ ਜੇ ਸਾਹਿਬ ਦੀ ਸੇਵਾ ਕਰਦੀ ਜੇ ਇਸਤੇਮਾਲ ਨਹੀਂ ਕਰਦੀ ਫਿਰ ਲੈ ਕੇ ਕਾਹਨੂੰ ਆਏ ਅਕਲ ਹੀ ਸਾਹਿਬ ਸੇਵੀਏ ਸਾਹਿਬ ਦੀ ਸੇਵਾ ਅਕਲ ਤੇ ਬਿਨਾ ਨਹੀਂ ਹੋ ਸਕਦੀ ਸ਼ਬਦ ਵਿਚਾਰ ਜਿਹੜਾ ਹੈ ਸਾਹਿਬ ਦੀ ਸੇਵਾ ਕੀ ਹੈ ਸਾਹਿਬ ਦੀ ਸੇਵਾ ਹੈ ਕਿ ਉਹਦਾ ਗਿਆਨ ਹੋ ਜਿਹੜਾ ਉਹਦਾ ਸਹੀ ਪਹੁੰਚ ਜਾਂਦਾ ਜਿਹਦੇ ਨਾਲ ਉਹਦੀ ਤੰਦਰੁਸਤੀ ਹੁੰਦੇ ਚਲੀ ਜਾਂਦੇ ਰੋਗ ਉਹਨੂੰ ਕਿੱਦੋਂ ਲੈ ਕੇ ਤੋ ਤੁਸੀਂ ਜਦੋਂ ਲੱਭ ਕੇ ਤੋ ਹੋ ਕੇ ਰੋਗ ਹੈ ਨਾ ਪੀਰ ਗੋ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਆਇਆ ਸੀ ਸਾਹਿਬ ਤੋਂ ਵਿੱਚ ਜਾਵੇ ਨਾ ਹੁਣ ਉਹ ਸਾਡੀ ਡਿਊਟੀ ਹੈ ਵਰਬੁੱਧੀ ਦੀ ਡਿਊਟੀ ਹੈ ਕਿੱਦੋਂ ਲਾਓ ਤੁਸੀਂ ਉਹੋ ਗਿਆਨ ਸਾਹਿਬ ਦੇ ਵਿੱਚੋਂ ਨਾ ਰਹੇ ਉਹ ਤਾਂ ਕਰਾਂਗੇ ਜੇ ਅਸੀਂ ਬੇਚੜਦਾਂਗੇ ਅਸੀਂ ਬੇਚ ਫਸ ਗਏ ਆਪ ਮੈਂ ਛੱਡਾਂਗੇ ਤਾਂ ਅਸੀਂ ਪਹਿਲੀ ਗੱਲ ਮੈਂ ਛੱਡ ਕੇ ਅਸੀਂ ਗੁਰਬਾਣੀ ਨੂੰ ਬੰਦ ਸਕਦੇ ਹਾਂ ਸਤਗੁਰੂ ਦੇ ਪਿੱਛੇ ਲੱਗ ਸਕਦੇ ਫਿਰ ਅਸੀਂ ਗੁਰਬਾਣੀ ਦਾ ਵਿਚਾਰ ਕਰਕੇ ਗੁਰਬਾਣੀ ਤੋਂ ਪੜ੍ਹ ਕੇ ਜੇ ਅਸੀਂ ਸਾਹਿਬ ਦੀ ਸੇਵਾ ਕਰ ਸਕਦੇ ਵਰਨ ਨਹੀਂ ਕਰ ਸਕਦੇ ਸਾਹਿਬ ਨੂੰ ਤਾਂ ਪਹਿਲਾਂ ਹੀ ਅਕਲ ਹੈਗੀ ਹੈ ਸਾਹਿਬ ਦੀ ਅਕਲ ਨਾਲ ਮਨ ਦੀ ਸੇਵਾ ਕਰਨੀ ਹੈ ਇਹ ਗੱਲ ਨਹੀਂ ਹੈ ਅਕਲੀ ਸਾਹਿਬ ਸੇਵੀ ਹੈ ਨਹੀਂ ਨਹੀਂ ਜਿਹੜੀ ਬੁੱਧੀ मन ਲੈ आया ਆਇਆ ਆ ਬੰਦੇ ਨਾਲ ਬੁੱਧੀ ਕਿਉਂ ਭੇਜੀ ਹੈ ਸਾਹਿਬ ਦੀ ਸੇਵਾ ਕਰਦੀ ਸੀ ਇਹ ਦੋਵੇਂ ਸਾਹਿਬ ਤੋਂ ਆਕੀ ਹੋਏ ਬੈਠੇ ਨੇ ਪਰ ਤੇਰਾ ਤਰ੍ਹਾਂ ਦੀ ਗੱਲ ਤਾਂ ਸੁਣਦਾ ਹੀ ਨਹੀਂ ਬੰਦੇ ਹੀ ਨਹੀਂ ਸਾਹਿਬ ਦੀ ਗੱਲ ਸੁਣਨੀ ਸੀ ਇਹੀ ਸਾਹਿਬ ਦੀ ਸੇਵਾ ਸੀ ਹਨਾ ਉਹ ਕੋਨੇ ਆਪਣੇ ਸਾਥ ਆਪਣੀ ਜ਼ਿੰਦਗੀ ਲਾਤੀ ਅਸੀਂ ਉਹਦੀ ਗੱਲ ਨਹੀਂ ਸੁਣਦੇ ਉਹਦੀ ਗੱਲ ਨਹੀਂ ਬਸ ਦੇ ਨਾ ਸੁਣਦੇ ਉਹਨੂੰ ਪਦਾਰਥ ਬਥੇਰੇ ਦਿੰਦੇ ਖਾਣ ਨੂੰ ਉਹ ਅੰਦਰੋਂ ਰਾਜੀ ਦੁਨੀਆਂ ਸਾਡੇ ਲੋਕ ਠੀਕ ਉਹ ਅੰਦਰੋਂ ਰਾਜੀ ਤੇ ਇਹ ਪਦਾਰਥਾਂ ਨਾਲੇ ਕੋਈ ਥੋੜਾ ਅਕਲ ਨਹੀਂ ਪਾਈਏ ਮਾਣ ਤਾਂ ਤੁਹਾਨੂੰ ਮਾਣ ਸਤਿਕਾਰ ਦਰਗਾਹ ਜੀ ਮਿਲੂਗਾ ਅਕਲ ਨਾਲੇ ਮਾਣ ਮਿਲਦਾ ਸੰਸਾਰ 'ਚ ਬੇਅਕਲ ਨੂੰ ਗੋਲਟੀ ਮਿਲਦਾ ਸੰਸਾਰ ਦੇ ਵਿੱਚ ਵੀ ਗੁਰੂਪ ਬਣਾ ਕੇ ਮਾਣ ਪਾਪ ਵੀ ਲਵੇ ਤਾਂ ਛੇਤੀਓ ਸੰਸਾਰੀ ਜਿਹੜਾ ਹੁੰਦਾ ਨਾ ਬਾਈ ਇਹ ਬਹੁਤਾ ਲੰਬਾ ਨਹੀਂ ਹੁੰਦਾ ਸੰਸਾਰੀ ਜਸ ਹੁੰਦਾ ਜਿਹੜੇ ਹਨ ਉਹ ਬਹੁਤੀ ਉਹਦੀ ਜ਼ਿਆਦਾ ਉਮਰ ਨਹੀਂ ਹੁੰਦੀ ਆਖਰ ਘਟਦਾ ਘਟਦਾ ਖਰਚ ਹਾਂਜੀ ਅਕਲ ਪੜ ਕੇ ਬੁੱਝੀ ਐ ਕੀਚੇ ਦਾਨ ਪੁੱਛ ਜੇ ਆਪਾਂ ਪੜਾਂਗੇ ਗੁਰਬਾਨੀ ਨੂੰ ਅਕਲ ਨਾਲੇ ਬੁੱਝਿਆ ਜਾਊਗਾ 부ਝਾ ਦਿੱਤਾ ਹੈ ਠੀਕ ਹੈ ਜੀ ਪਹਿਲਾਂ ਪੜਨਾ ਫਿਰ ਪੜ ਕੇ ਬੁੱਝਣਾ ਪੜ ਕੇ ਬੁੱਝ ਸਭ ਜਾਣ ਲਈ ਵੀ ਗੱਲ ਨਹੀਂ ਸਮਝਣ ਵਾਲੀ ਤਾਂ ਗੱਲ ਸਮਝ ਨਹੀਂ ਗਾਹਾਂ ਅੱਗੇ ਪੁੱਛਣੇ ਫਿਰ ਪੁੱਛਣ ਵੇਲੇ ਗਿਆਨ ਧਿਆਨ ਦੀ ਲੋੜ ਹੈ ਤੇ ਅਕਲ ਹੀ ਕੀਚ ਜੇ ਕਿਸੇ ਨੂੰ ਦਾਨ ਕਰਨਾ ਸਮਝਾਉਣਾ ਵੀ ਅਕਲ ਨਾਲ ਜਿਹੜਾ ਹੁੰਦਾ ਨਾ ਬੇਅਕਲੀ ਦੀ ਜਿਹੜੀ ਸਿੱਖਿਆ ਉਹ ਪੁੱਲ ਢੀ ਹੈ ਪਾਸ ਹੈ ਉਹ ਹੈ ਉਹ ਪੁੱਲ ਪੁੱਤੇ ਵਾਲੀ ਗੱਲ ਨੂੰ ਖੋਲ ਰਏ ਨੇ ਹੁਣ ਜੇ ਬੇਅਕਲੀ ਨਾਲ ਆਪਾਂ ਗਿਆਨ ਫੈਲਾ ਰਹੇ ਹਾਂ ਨਾ ਆ ਚਲੋ ਪਤਾ ਲੱਗੇ ਤਾਂ ਵੀ ਜੇ ਨਹੀਂ ਹਟਦੇ ਫਿਰ ਉਹ ਪਾਪ ਕਰ ਰਹੇ ਹੋ ਚਾਹੇ ਝੂਠ ਦਾ ਪਾਪ ਹੋ ਜਾਏ ਗਿਆਨ ਤਾ ਧਰਮ ਹੈ ਉਹ ਭਾਈ ਜੇ ਨਹੀਂ ਪਹਿਲਾਂ ਪਤਾ ਸੀ ਹੁਣ ਪਤਾ ਲੱਗਿਆ ਹੁਣ ਹਟ ਜੋ ਪਰ ਹੁਣ ਉਹ ਪ੍ਰੇਸਟੀਜ ਬਣਾ ਲਿਆ ਸਭ ਨੇ ਡਰ ਕਦਾ ਰਹਾ ਹੈ ਪ੍ਰੇਸਟੀਜ ਬਣਾਉਣਾ ਧਰਮ ਦੇ ਵਿੱਚ ਇਹੀ ਡਰ ਕਦਾ ਰਹਾ ਹੈ ਦਰਕੋਰ ਦਾ ਦੁਆਰਾ ਹੈ ਤੇ ਉਹ ਨਾਨਕ ਆਖੇ ਰਹਾ ਹੈ ਇਹ ਹੋਰ ਗੱਲਾਂ ਸ਼ੈਤਾਨ ਨਾਨਕ ਕਹਿੰਦਾ ਇਹੀ ਰਸਤੇ ਭਾਈ ਹੋਰ ਗੱਲਾਂ ਸ਼ੈਤਾਨ ਲਬਜ਼ ਕਿ ਉੱਪਰ ਤੇ ਜਿਹੜੇ ਜੋਗੀ ਨੇ ਨਾ ਉਹ ਅੱਦੇ ਮੁਸਲਮਾਨ ਦੇ ਮੁਸਲਮਾਨ ਧਰਮ ਨਾਲ ਦਾ ਉਪਰਵਾਂ ਨਹੀਂ ਸੋਇਆ ਸਿੱਧਾਂ ਚ ਜੋਗੀ ਬਣੇ ਉਹਨਾਂ ਨੂੰ ਕਹਦੇ ਹੋਰ ਗੱਲਾਂ ਦਾ ਸ਼ੈਤਾਨਦਿਆਂ ਦੇ ਜਿਹੜੇ ਮਦਾਨੀ ਇਲਾਕੇ ਜੋਗੀ ਸੀ ਜਿਹਦੇ ਨਾਲ ਤਬਾਦ ਹੋਇਆ ਜੋਗਮਤਨ ਉਹ ਜੋਗੀ ਸੀ ਜਿਹੜੇ ਪਹਾੜਾਂ 'ਚ ਬੈਠੇ ਹੋ ਸਿੱਧ ਸੀ ਉਸਵਾਦੀ ਤੋਂ ਹਾਂ ਦੀ ਇੱਕੋ ਹੀ ਹੈ ਕੋਈ ਫਰਕ ਨਹੀਂ ਉਹ ਹੋਰ ਗੱਲਾਂ ਦਾ ਸ਼ੈਤਾਨ ਦੇ ਸ਼ੈਤਾਨ ਜਿਹੜਾ ਬਨ ਹੈ ਬੰਤੀਆਂ ਗੱਲਾਂ ਨੇ ਸ਼ੈਤਾਨ ਦੇ ਮਗਰ ਲੱਗੇ ਹੋਣੇ ਫਿਰ ਤਾਂ ਸ਼ੈਤਾਨ ਦਾ ਪਹਿਰਾ ਤੁਹਾਡੇ ਤੇ ਧਰਮ ਸ਼ੈਤਾਨ ਤੋਂ ਖਿਲਾਫ ਹੈ ਸ਼ੈਤਾਨ ਹੈ ਜੋ ਪ੍ਰਚਾਰ ਦੇ ਫਿਰ ਧਰਮ ਕਰਦਾ ਸੋ ਹਾਂ ਜਾਣਦਾ ਵੀ ਹੈ ਵੀ ਗੱਲ ਵਿੱਚ ਜੋ ਕਹਿ ਰਿਹਾ ਠੀਕ ਨਹੀਂ ਹੈ ਫਿਰ ਵੀ ਉਹ ਕਹੀ ਜਾਂਦਾ ਉਸ ਤੇ ਇਨਸਿਸਟ ਕਰਦਾ ਹੈ ਕਰਦਾ ਉਹ ਤਾਂ ਸ਼ੈਤਾਨ ਹੈ ਫਿਰ ਧਾਰਮਿਕ ਬੰਦਾ ਨਹੀਂ ਹੈ ਸ਼ੈਤਾਨ ਉਹ ਸ਼ੈਤਾਨ ਨੂੰ ਇਸਲਾਮ ਤੋਂ ਬਹੁਤ ਡਰਾ ਦੱਸਿਆ ਬਹੁਤ ਮਾਰ ਦੱਸਿਆ ਹੈ ਇਸ ਕਰਕੇ ਉਹਨਾਂ ਨੇ ਇਸਲਾਮ ਦੀ ਹੋਈ ਮਿਸਾਲ ਦਿੱਤੀ ਫੜੀ ਮਹੱਲਾ ਦੂਜਾ ਜੈਸਾ ਕਰੈ ਕਹਾਵੇ ਤੈਸਾ ਐਸੀ ਬਣੀ ਜ਼ਰੂਰਤ ਹੋਵੇ ਲਿੰਗ ਚਿੰਗ ਨਾ ਹੋਵੇ ਐਸੀ ਕਹੀਏ ਸੂਰਤ ਜੈਸਾ ਕਰੇ ਕਹਾਵੇ ਤੈਸਾ ਜੇ ਹੁਣ ਅਸੀਂ ਸਿੱਖ ਹੈਗੇ ਆ ਤਾਂ ਸਿੱਖ ਕਹਾਉਣਾ ਚਾਹੀਦਾ ਜੇ ਮੁਸਲਮਾਨ ਹੈਗੇ ਆ ਹੈਗੇ ਸਿੱਖ ਤਾਂ ਮੁਸਲਮਾਨ ਕਹਾਵੋ ਮੁਸਲਮਾਨ ਕਹਾਉਣਾ ਹੋਰ ਹੋਏ ਤਾਂ ਮੁਸਲਮਾਨ ਕਹਾਓ ਕੋਈ ਐਸਾ ਕੋਈ ਹੋਵੇ ਉਸੇ ਸੀ ਤੇ ਭਾਈ ਮੈਂ ਤਾਂ ਅਜੇ ਮੁਸਲਮਾਨ ਨਹੀਂ ਹਾਂ ਕੋਸ਼ਿਸ਼ ਕਰ ਰਹੇ ਹਾਂ ਮੁਸਲਮਾਨ ਬਣਨ ਦੀ ਅਕੀਦਾ ਰੋਜ਼ ਅੱਲਾਹ ਦੇ ਅੱਗੇ ਖੁਦਾ ਦੇ ਅੱਗੇ ਦੁਆ ਕਰਦੇ ਹਾਂ ਵੀ ਸਾਨੂੰ ਸਹੀ ਮੁਸਲਮਾਨ ਬਣਾ ਲੈ ਅਸੀਂ ਸਿੱਖ ਵੀ ਇਹ ਕਹੀਏ ਵੀ ਗੁਰੂ ਪੂਰਿਆ ਅਸੀਂ ਤਾਂ ਅਰਦਾਸ ਕਰਦੇ ਹਾਂ ਵੀ ਸਾਨੂੰ ਸਮਰਥ ਬਖਸ਼ ਸਿੱਖ ਬਣਾ ਲੈ ਇਹ ਜੇ ਅਸੀਂ ਇੱਛਾ ਹੋਊ ਸਾਡੀ ਤਾਂ ਅਰਦਾਸ ਕਰਾਂਗੇ ਇਹ ਤਾਂ ਕਰਦਾ ਹੀ ਕੋਈ ਅਰਦਾਸ ਜਿਹੜਾ ਇਹ ਕਰਦਾ ਉਹਨੂੰ ਮਿਲ ਵੀ ਜਾਂਦਾ ਕਰਦੇ ਨੇ ਵੀ ਕਰਦੇ ਸੀ ਐਸੀ ਗੱਲ ਉਹ ਆਟੇ ਚ ਲੋੜ ਜਿੱਦੀ ਗੱਲ ਹੈਗੀ ਆ ਉਹ ਬਿਲ ਲੈ ਬਿਲ ਦੇ ਹੈਗੇ ਹੁੰਦੇ ਹੀ ਉਹ ਕਰਦੇ ਹੀ ਹੁੰਦੇ ਨੇ ਐਸੀ ਬੜੀ ਜ਼ਰੂਰਤ ਕਹਿੰਦੇ ਐਸੀ ਅਸਲ ਦੇ ਵਿੱਚ ਜ਼ਰੂਰਤ ਹੈ ਆਪਾਂ ਨੂੰ ਇਹ ਸਾਡੀ ਜ਼ਰੂਰਤ ਹੈ ਸਾਡੇ ਫਾਇਦੇ ਦੀ ਗੱਲ ਹੈ ਕਿ ਅਸੀਂ ਪਹਿਲਾਂ ਹੀ ਸਿੱਖ ਕਹਾ ਗਏ ਫਿਰ ਸਿੱਖੀ ਨਹੀਂ ਲੈ ਸਕਦੇ ਸਿੱਖ ਤਾਂ ਉਹ ਨਹੀਂ ਬਣ ਗਏ ਅਸੀਂ ਇਹ ਸਾਡੇ ਵਾਸਤੇ ਨੁਕਸਾਨ ਦੇ ਹੈ ਫਾਇਦੇ ਵਾਲੀ ਗੱਲ ਦੀ ਇਹ ਲੋੜ ਐ ਇਸ ਗੱਲ ਦੀ ਜੈਸਾ ਹੋਵੇ ਪੈਸਾ ਕਹਾਵੇ ਹੋ ਉਹਨੂੰ ਕਦੇ ਕਮ ਆਪਣਾ ਪਤਾ ਲੱਗੇ ਵੀ ਮੈਂ ਸਿੱਖ ਹੈ ਨਹੀਂ ਭਾਈ ਸਿੱਖੀ ਦੀ ਬਿਲੂ ਲੋੜ ਹੈ ਜੇ ਉਹ ਸਿੱਖ ਹੈਗਾ ਫਿਰ ਉਹਨੂੰ ਲੋੜ ਨਹੀਂ ਜਰੂਰ ਤੇ ਨਹੀਂ ਫਿਰ ਤਾਂ ਉਹਨੂੰ ਸਿੱਖੀ ਦੀ ਸਿੱਖਿਆ ਲੈਣੀ ਦੀ ਹੋਪ ਲਿੰਗ ਲਿੰਗ ਨਹੀਂ ਹੋਵੇ ਅਨ ਲਿੰਗ ਹੋਵੇ ਉਹ ਮਤਲਬ ਹੈ ਹੋਵੇ ਤਾਂ ਆਦਮੀ ਬਣ ਪਰ ਐ ਨਾ ਹੋਵੇ ਚੰਗਾ ਨਾ ਹੋਵੇ ਚੀਗ ਨੂੰ ਕੱਢਿਆ ਉਸਦੇ ਲੋਕ ਜੇ ਤਾਂ ਜੈਸਾ ਹੈ ਤੈਸਾ ਕਹੋਦਾ ਸ਼ੈਤਾਨ ਲੈ ਗਿਆ ਹੋ ਜੇ ਉਹ ਮੁਸਲਮਾਨ ਜਾਂ ਸਿੱਖ ਹੈ ਨਹੀਂ ਫਿਰ ਸਿੱਖ ਹੈ ਮੁਸਲਮਾਨ ਹੋਦਾ ਫਿਰ ਉਹ ਝਗ ਉਹ ਚੜਾ ਜਿਹੜਾ ਉੱਪਰ ਉਹ ਜਿਹੜਾ ਚੜਾ ਲੂ ਨਾ ਝੱਗ ਉਹ ਕਹਿ ਰਹੇ ਵੀ ਝੱਗ ਨੂੰ ਨਹੀਂ ਛੇੜ ਸ਼ੈਤਾਨ ਸ਼ੈਤਾਨ ਦੇ ਝੱਗ ਹੋਗਾ ਲਿੱਗ ਹੋਣ ਦੀ ਜ਼ਰੂਰਤ ਲਿੱਗ ਜਿਹੜਾ ਹੈ ਕਿਉਂ ਲਫ਼ਜ਼ ਵਰਤੇ ਸਵਾਲ ਹੈ ਕਿਉਂਕਿ ਇਹ ਪੁਲਿੰਗ ਆਪਣੇ ਆਪ ਨੂੰ ਸਮਝਦਾ ਹੈ ਇਹਦਾ ਲਿੰਗ ਬਦਲੀ ਹੋਣਾ ਇਸ ਲਈ ਲਗੜ ਜਾਣਾ ਫਿਰ ਇਹ ਲੁਦੀ ਹੋ ਜਾਣੀ ਮੰਨ ਲੈ ਬਦ ਜਾਣ ਇਸ ਵਕਤੇ ਵਿਚਾਰੇ ਹੈ ਹਨ ਪ੍ਰਧਾਨ ਹੈ ਬੁੱਧੀ ਬਨ ਮੁਖੀ ਹੈ ਪਰ ਬੁੱਧੀ ਦੇ ਥੱਲੇ ਮੰਨਣ ਲੱਗ ਕੇ ਜਾ ਚੱਲਣਾ ਨਾ ਪਰ ਬੁੱਧੀ ਨੇ ਫਿਰ ਹੁਕਮ ਦੇ ਵਿੱਚ ਆਉਣ ਫਿਰ ਗੁਰ ਮੁਖੀ ਲਫ਼ਜ਼ ਹੋ ਜਾਊਗਾ ਇਸ ਕਰਕੇ ਬਿਊਟਲ ਰੱਖਿਆ ਲਿੰਗ ਲੋ ਇਸ ਲਈ ਇਹਨਾਂ ਕੋਲ ਇਹ ਰੱਖਿਆ ਹੋਇਆ ਦਾ ਲਿੰਗੇ ਰੱਖਿਆ ਹੋਇਆ ਚੇਤਨਾ ਹੋਵੇਗਾ ਜੇ ਝਗ ਬਣ ਗਿਆ ਆਪਣੇ ਆਪ ਨੂੰ ਗੁੰਦ ਲਿਆ ਬਸ ਸਿੱਖਾਂ ਕੋਲ ਨੂੰ ਬਣ ਗਿਆ ਪਹਿਲਾਂ ਹੀ ਐਸੀ ਕਹੀਆ ਸੂਰਤ ਐਸੀ ਸੂਰਤ ਹੋਣੀ ਚਾਹੀਦੀ ਆਪਣੇ ਪਾਣੀ ਜਿਹੜਾ ਚੱਲਦਾ ਉਹ ਘੁਰ ਕੇ ਪਾਣੀ ਜਿਹਦਾ ਚੱਲੂਗਾ ਫੇਰ ਉਹ ਲਿੰਗ ਬਦਲੀ ਹੋ ਜਾਂਦਾ ਹਾਂ ਦਾ ਹਾਂਜੀ ਅਸਲ ਲਿੰਗ ਦਾ ਮਤਲਬ ਹੈ ਵੀ ਮੇਲ ਜਾਂ ਫੀਮੇਲ ਤੋਂ ਹੈ ਜੀ ਜੋ ਆਪ ਫਿਰ ਜੇ ਲੈ ਡੋ ਹੋਵੇ ਫਿਰ ਉਹਦੀ ਜਿਹੜੀ ਇੱਛਾ ਹੈ ਉਹ ਫਾਲੋ ਦਾ ਬਿਲਜੁਲ ਬਿਊਟਲ ਹੈ ਜੇ ਬੈਗ ਦੇ ਪਾਇਆ ਹੋਇਆ ਫਿਰ ਤਾਂ ਬੈ ਕੇ ਜਾਊਗਾ ਅੱਗੇ ਤਾਂ ਜਾ ਨਹੀਂ ਸਕਦਾ ਜੋ ਮਰਜੀ ਉੱਤੋਂ ਚਾਹੇ ਤੁਸੀਂ ਉਹਨੂੰ ਸੁਣਾਈ ਜਾਓ ਉਹਦਾ ਬੈਗ ਦੇ ਪਾਇਆ ਹੋਇਆ ਹੈ ਨੇ ਬੈਗ ਦੇ ਪਾਇਆ ਹੋਇਆ ਉਹਨਾਂ ਤੇ ਥਾਕਾ ਮਾਰੀ ਜਾਵੇ ਜੇ ਦੂਰੋਂ ਖੜਾ ਕੋਈ ਆ ਜਾ ਅੱਗੇ ਨੂੰ ਆ ਜਾ ਅੱਗੇ ਨੂੰ ਆ ਜਾ ਅੱਗੇ ਨੂੰ ਕਿਵੇਂ ਜਾਊਗਾ ਤਾਂ ਪਿੱਛੇ ਜਾਊਗਾ ਉਹਨੇ ਆਪਣਾ ਧੇਰ ਪਾਇਆ ਹੈ ਬੈਗ ਦੇ ਬਿਊਟਲ ਗੇਰਜ ਨਾ ਇਹ ਉਹ ਮੂਰਤ ਉਹ ਅਕਾਲ ਮੂਰਤ ਬਣ ਜਾਂਦੀ ਹੈ ਫਿਰ ਉਹ ਅਸਲ ਦੇ ਵਿੱਚ ਉਹ ਜਿਹੜਾ ਕਾਰੀ ਅਸਲ ਸ਼ਰੀਰ ਨਹੀਂ ਹੈ ਮਾਇਆ ਦੀ ਪੁਰਤੀ ਨਹੀਂ ਹੁੰਦੀ ਮਾਇਆ ਦੀ ਬਣਾ ਲਈ ਇਹਨਾਂ ਨੇ ਪੁਰਤੀ ਲੱਗਦਾ ਮਾਇਆ ਦੀ ਨਹੀਂ ਹੁੰਦੀ ਪੁਰਤੀ ਅਕਾਲ ਮੂਰਤੀ ਹੈ ਮੂਰਤੀ ਤਾਂ ਤੋਂ ਪਰੇ ਮਾਇਆ ਦੀ ਬਣਾਤੀ ਮੂਰਤੀ ਪੁਰਤੀ ਮਾਇਆ ਦੀ ਹੁੰਦੀ ਹੋਣੀ ਹੈ ਅਕਾਲ ਮੂਰਤ ਤਾਂ ਹੀ ਕਿਹਾ ਹੈ ਜੀ ਇਹ ਮੂਲ ਦੇ ਗੁਣ ਹੈ ਉਹ ਮੂਲ ਰੂਪ 'ਚ ਆ ਗਿਆ ਹੈ ਆਹ ਉਹ ਆ ਗਿਆ ਹਲੇ ਮੂਰਤ ਆ ਗਾਲ ਮੂਰਤ ਕਿਉਂਕਿ ਮੂਰਤ ਐ ਹੋ ਅੱਛਾ ਅਕਾਲ ਪੂਰਤ ਬਣ ਸਕਦਾ ਹੋ ਸਤਗੁਰ ਦੇ ਬਾਣੇ ਚੱਲ ਕੇ ਹਾਂਜੀ ਥੌੜੀ ਸਤਗੁਰ ਅੰਮ੍ਰਿਤ ਬਿਰਖ ਹੈ ਅੰਮ੍ਰਿਤ ਰਸ ਫਲਿਆ ਜਿਸ ਪ੍ਰਾਪਤ ਸੋ ਲਹੈ ਗੁਰ ਸ਼ਬਦੀ ਮਿਲਿਆ ਕਿ ਸਤਪੁਰ ਦੇ ਬਾਣੇ ਚੱਲਣਾ ਸਤਗੁਰ ਕੋਲ ਕੀ ਆ ਗੁਰੂ ਬਰਖਾ ਉਹ ਬਰਦਾ ਬਰਖਾ ਤੋਂ ਬਧ ਫੜ ਲ ਗਿਆ ਉਬਰਤਰ ਆਸਣਾ ਫੜਿਆ ਹੋਇਆ ਉਬਰਤਰ ਆਸ ਉੱਥੋਂ ਬੜੂ ਅਬਰਤਰ ਆਸ ਕਿਹ ਬਿਰਤੀਉ ਤੇ ਰਾਹ ਤੋਂ ਜਾਂਦਾ ਅਬਰਿਤ ਜੋ ਬਿਰਤੀਉ ਤੇ ਪਰੇ ਲਹਿ ਜਾਂਦਾ ਜਿਤਿ ਸਰੀਰ ਦੀ ਹੈ ਮਾਇਆ ਦੀ ਹੈ ਮਾਇਆ ਦੇ ਸਮੇਂ ਦਾ ਅਸਰ ਹੈ ਆਤਮਾ ਤੇ ਸਮੇਂ ਦਾ ਅਸਰ ਨਹੀਂ ਹੈ ਆਤਮਾ ਕੁਮੰਡਲ ਵਿੱਚ ਲਹਿ ਜਾਂਦਾ ਸੱਚਖਲ ਜਿਹੜਾ ਹੈ ਜਿਤ ਤਿੰਨ ਲੋਕ ਦੇ ਵਿੱਚ ਕਾਲ ਲਈ ਜੁਦਾ ਅਜਿਹਾ ਤੱਕ ਪਾਪ ਔਰ ਪੁੰਨ ਉੱਥੇ ਤੱਕ ਤੋਹਾਂ ਹੈ ਕਾਲ ਜਿਹੜਾ ਹੈਗਾ ਪਾਪ ਕਾਲ ਵਸ ਹੈ ਉਹ ਜਿਹੜਾ ਹੈ ਸਰਦਾਰਾ ਬਾਜਦਾ ਉਹਨਾਂ ਕਾਲ ਤੋਂ ਪਰੇ ਲੈ ਜਾਂਦਾ ਕਾਲ ਦੇ ਯਾਰ ਤੋਂ ਪਰੇ ਛੱਟ ਕੇ ਲੈ ਜਾਂਦਾ ਅਬਰਸ ਰਸ ਖਲਿਆ ਜਿਸ ਪ੍ਰਾਪਤ ਸੋਲ ਹੈ ਜਿਹਨੂੰ ਪ੍ਰਾਪਤ ਹੋ ਜਾਂਦਾ ਹੈ ਫਲ ਕੇ ਉਹ ਲਾਹੇ ਚਲਾ ਜਾਂਦਾ ਜਿਸ ਪ੍ਰਾਪਤ ਸੋਲ ਹੈ ਜਿਹਨੂੰ ਮਿਲੇ ਉਹੀ ਲੈ ਸਕਦਾ ਜਿੱਤੋਂ ਬੋਲ ਜਿਹੜੇ ਗੁਰੂ ਘਰ ਦੇ ਵਿੱਚ ਬੈਠੇ ਰਹੇ ਸੰਦਤ ਕਰਦੇ ਰਹੇ ਉਹਨਾਂ ਨੂੰ ਲਾਹ ਉਹਨਾਂ ਨੇ ਲੈ ਲਿਆ ਉਦੋਂ ਪ੍ਰਾਪਤ ਹੁਦਦਾ ਸੀ ਜਿਹੜੇ ਸੰਗ ਤੇ ਨਹੀਂ ਸੀ ਕਰਦੇ ਉਹਨੂੰ ਪ੍ਰਾਪਤ ਨਹੀਂ ਹੋਇਆ ਉਹਨੂੰ ਲਾਇਬ੍ਰੇਰੀ ਸਕੇ ਵਿਚਾਰੇ ਗੁਰ ਸ਼ਬਦ ਦੀ ਗੁਰ ਉਪਦੇਸ਼ ਨਾਲ ਹੁਣ ਸਾਡੇ ਕੋਲ ਐਸ ਗੁਰ ਉਪਦੇਸ਼ ਨਾਲ ਜੁੜੇ ਤੇ ਤੂੰ ਸਕਦਾ ਠੀਕ ਹੈ ਜੀ ਜਿਹੜਾ ਅੰਮ੍ਰਿਤ ਸ਼ਬਦ ਦੀ ਉਚਾਰਣ ਆਪਣਾ ਜੇ ਆਪਾਂ ਮਾਤਰਾ ਦਾ ਖਿਆਲ ਰੱਖੀਏ ਤਾਂ ਰ ਅੱਧਾ ਹੈ ਨਾ ਜੀ ਹਾਂ ਜੀ ਹਾਂ ਤਾਂ ਇਹਦਾ ਅੰਮ੍ਰਿਤ ਬਣਦਾ ਹੈ ਹਾਂਜੀ ਅਮਰਿਤ ਹੈ ਜਿਹਦੀ ਮਰਤਿਉ ਨਾ ਹੋ ਸਕੇ ਉਹ ਮਰਤਿਉ ਤੋਂ ਪਰੇ ਲੱਗ ਜਾਂਦਾ ਪੜਦੇ ਨਾਨਕ ਅੰਮ੍ਰਿਤ ਇੱਕ ਹੈ ਜਿਹੜਾ ਏਕ ਹੋ ਗਿਆ ਉਹ ਮਰਤਿਉ ਤੋਂ ਪਰੇ ਹੋ ਜਾਂਦਾ ਹੈ ਨਾ ਜੀ ਨਹੀਂ ਉਹ ਕਹਿੰਦੇ ਇੱਕੋ ਹੀ ਅਮਰ ਦੂਜਾ ਕੋਈ ਤਾਂ ਦੂਜਾ ਆ ਗਿਆ ਨਾ ਨਹੀਂ ਪਰ ਦੂਜਾ ਜਿਹੜਾ ਮਾਇਆ ਨਾਲ ਜੁੜਿਆ ਹੋਇਆ ਉਹ ਤਾਂ ਅੰਮ੍ਰਿਤ ਅਮਰਤ ਜਿਹੜਾ ਹੈ ਇੱਕੋ ਹੀ ਅਮਰਤ ਹੈ ਇਹ ਜਿਹੜੇ ਗੁਰਬਾਣੀ ਜਿਹੜੇ ਦੀ ਵੀ ਉਹ ਚ ਕੋਈ ਅਮਰਤ ਹੈ ਨਾ ਅਮਰਤ ਦੇ ਕੋਈ ਅਮਰਤ ਨਾਮ ਹੈ ਨਾ ਅੱਗੇ ਕੀਤੀ ਉੱਥੇ ਚਲੇ ਜਾਂਦੇ ਹਮੇਸ਼ਾ ਹੀ ਉਹ ਫਿਰ ਅਮਰਤ ਉਹਨੂੰ ਜਾਣ ਕੇ ਬਲੈਕਮੇਲਰ ਜਿਹੜੇ ਸੀ ਉਹਨਾਂ ਨੇ ਉਹ ਨੂੰ ਅਮਰਤ ਨਾ ਉਹਦਾ ਗੁਰਬਾਣੀ ਤੋਂ ਧਿਆਨ ਨਾ हटਾਈਏ ਕਿ ਅਮਰਤ ਜੀ ਉਹ ਕਹਿ ਦਿੰਦੇ ਜੇ ਮਾਇਆ ਲਈ ਅਮਰਤ ਹੋ ਤਾਂ 36 ਸਾਲ ਦੇ ਕੋਲ ਗਈ ਪਏ ਇਹ ਪ੍ਰਸਾਦ ਛੱਤੀ ਵਰਤ ਖਾਂ ਦੇ ਜਿਹੜੇ ਖਾਣੇ ਵਾਲੇ ਵਰਤ ਨੇ ਉਹ ਤਾਂ ਛੱਤੀ ਨੇ ਤੇ ਟਾਹੀ ਦੇ ਜਦ ਹੁਣ ਪ੍ਰਚਾਰ ਕਰ ਬੈਠੇ ਮਹਾਂਪੁਰਖ ਕਹਿ ਬੈਠੇ ਬੜੇ ਬੜੇ ਉਹਨਾਂ ਨੇ ਜੁਗਾਰ ਬਣਾ ਲਏ ਹੁਣ ਸਾਰੇ ਢਹਿ ਘੇਰੀ ਹੁੰਦੇ ਨੇ ਤਲਫਣਾ ਤਾਂ ਹੋਣੀ ਨਾ ਉਹਨਾਂ ਨੂੰ ਕਿਉਂਕਿ ਤਾਂ ਗਿਆਨ ਗਿਆਨ ਹੀ ਅੰਮ੍ਰਿਤ ਦਾ ਬ੍ਰਖ ਹੈਗਾ ਬਿਲਕੁਲ ਜੇ ਸਤਗੁਰ ਜਿਹੜਾ ਹੈਗਾ ਜੇ ਆਪਾਂ ਜਿਹੜਾ ਇੱਕ ਹੋ ਗਿਆ ਜਿਹਦੇ ਮਤਲਬ ਦਾ ਉੱਗਿਆ ਆ ਜਿਹਦੇ ਵਿੱਚ ਉਹ ਵੀ ਸਤਗੁਰ ਹੈ ਉਹ ਉਹ ਵੀ ਗੱਲ ਕਹਿ ਰਹੇ ਨੇ ਪੂਰਾ ਕੀ ਕਰੇ ਜੇ ਸਿੱਖਰ ਬਿਝੂਕ ਪਰ ਅੰਮ੍ਰਿਤ ਤਾਂ ਗਿਆਨ ਦੇ ਪ੍ਰਥਾਈ ਵਰਤਿਆ ਜਾਂਦਾ ਹੈ ਅਸੀਂ ਅੰਮ੍ਰਿਤ ਨੂੰ ਜੇ ਗਿਆਨ ਤੋਂ ਹਟਾਵਾਂਗੇ ਤਾਂ ਗੱਲ ਵਿਗੜ ਜਾਂਦੀ ਹੈ ਆਦਮੀ ਨੂੰ ਪਰਤੀ ਦਊਗਾ ਗਿਆਨ ਦੇ ਦਊਗਾ ਫੁਰਤੀ ਦਊਗਾ ਸਤਗੁਰ ਅੰਮ੍ਰਿਤ ਬਿਰਖ ਹੈ ਸਤਗੁਰ ਤੋਂ ਉਹਦਾ ਗਿਆਨ ਹੈ ਮਿਲਣਾ ਸਤਗੁਰ ਨੇ ਜਿਹੜੇ ਸਾਨੂੰ ਪੈਸੇ ਦੇਣੇ ਆ ਕੋਈ ਹੋਰ ਦੇਣਾ ਹਾਂ ਨਾਂ ਨਾ ਕੇ ਕਰਕੇ ਬਲ ਕੁਛ ਹੈ ਹੀ ਵੀ ਨਹੀਂ ਹਿਰਦੇ ਬਹੁਤ ਸਾਰੀਆਂ ਗੱਲਾਂ ਸੀ ਸਾਡੇ ਕੋਲ ਅਧੂਰੇ ਕਰਕੇ ਚੁੱਪ ਕਰ ਰਹੇ ਸੀ ਜਿੰਨਾ ਚਿਰ ਅਧੂਰਾ ਪਣ ਰਹੇ ਇੱਕ ਇੱਕ ਦੋ ਦੋ ਗੱਲਾਂ ਜਿਹੜੀਆਂ ਹੁੰਦੀਆਂ ਸਭ ਨੂੰ ਚਾਹਿਆ ਨਹੀਂ ਉਹਦਾ ਬਹੁਤਾ ਰੌਲਾ ਨਹੀਂ ਪਾਉਣਾ ਚਾਹੀਦਾ ਜਿਵੇਂ 6 ਕੀਤੇ ਹੁੰਦੇ ਨੇ ਨਾਈਪਾ ਕੁਰਬਾਨੀ ਸਾਰੀ ਚ ਅੰਮ੍ਰਿਤ ਸ਼ਬਦ ਸਤਿਗੁਰ ਨਾਲ ਜੁੜ ਗਿਆ ਗਿਆਨ ਨਾਲ ਜੁੜ ਗਿਆ ਹਾਂਜੀ ਉਹ ਕਾਹ ਨੂੰ ਸੁਣ ਦਿੰਦੇ ਨੇ ਇੱਕ ਅੱਦੇ ਦੀ ਗੱਲ ਇਹਨਾਂ ਦਾ ਨੈਟਵਰਕ ਬਹੁਤ ਹੈ ਭੀੜਾਂ ਇਕੱਠੀਆਂ ਕਰਨ ਵਾਲੇ ਲੋਕ ਨੇ ਭੀੜੋਂ ਤਾਂ ਸੁਣਦੀਆਂ ਨੇ ਤਾਂ ਹੀ ਪੰਜ ਪਿਆਰਿਆਂ ਨੂੰ ਦਿੱਤੀ ਸੀ ਵੀ ਉਹੀ ਸੁਣਨਗੇ ਉਹੀ ਦੱਸਣਗੇ ਹੁਣ ਤਾਂ ਮੋਬੋਕਰੇਸੀ ਹੋਈ ਹੋਈ ਹੈ ਜੀ ਹਾਂਜੀ ਜਿਸ ਪ੍ਰਾਪਤ ਸੋ ਲਹੇ ਗੁਰ ਸ਼ਬਦੀ ਮਿਲਿਆ ਇਹ ਵੀ ਹੈ ਕਿ ਗੁਰ ਸ਼ਬਦੀ ਵਿਚਾਰ ਚੋਂ ਹੀ ਮਿਲਦਾ ਅੰਮ੍ਰਿਤ ਬਿਲਕੁਲ ਉਪਦੇਸ਼ੋਂ ਮਿਲਣਾ ਉਹਦੇ ਸਾਡੇ ਕੋਲ ਅੱਖਰ ਚ ਪਿਆ ਪਹਿਲਾਂ ਉਹ ਜਵਾਬੀ ਕਰਦੇ ਸੀ ਠੀਕ ਹੈ ਜੀ ਆ ਦੇਖੋ ਨਾਮਰ ਦੀ ਵਾਕਿਆ ਆ ਗਈ ਹੁਣ ਸਤਿਗੁਰ ਕੇ ਬਾਣੇ ਜੋ ਚੱਲੈ ਹਰ ਸੇਤੀ ਬਿੜਿਆ ਆਪਣੀ ਗੂਲ ਚ ਮਿਲ ਜਾਂਦਾ ਕਿਉਂਕਿ ਜਿਹੜੇ ਅਧਵੀ ਨੂੰ ਉਹਦੋ ਸਮਝਾ ਰਹੇ ਨੇ ਉਹ ਹਰੀ ਨੂੰ ਬੰਦਾ ਹਰੀ ਅੱਲਾ ਬਰਦਾਸੀ ਹਰ ਬੋਲ ਦੇਦਾ ਸੀ ਰਾਲੇ ਤੋਂ تیاری ਹੈ ਉਹ ਹਰੀ ਨੂੰ ਮਿਲਦਾ ਹੈ ਹਰੀ ਦਾ ਦਰਸ਼ਨ ਹਰੀ ਦੀ ਗੱਲ ਨਾਲ ਮਿਲਣਾ ਦਾ ਦਰਸ਼ਨ ਨਹੀਂ ਕਰਨਾ ਹਰੀ ਦਾ ਆਪਣੇ ਮੂਡ ਤੇ ਨਾਲ ਮਿਲਿਆ ਜੇ ਵਾਸਤੇ ਉੱਥੇ ਦਰਸ਼ਨ ਦੇ ਕੇ ਹਰੀ ਆਪਣੇ ਘਰ ਨੂੰ ਚਲਾ ਗਿਆ ਹੋਤੀ ਉੱਥੇ ਬਲੈਕਮੈਲ ਕੀਤਾ ਨਾ ਹਰ ਛੇਤੀ ਹਾਂ ਹਰੀ ਦਾ ਦਰਸ਼ਨ ਕਰਕੇ ਤਾਂ ਉਹ ਜੇ ਦੇ ਵਿੱਚ ਗਿਆ ਤੇ ਆਹ ਵਾਪਸ ਆਉਂਦਾ ਤੇ ਕਹੇ ਜਮਕਾਲ ਜੋ ਨਾ ਸੱਕੈ ਕਰ ਚਾਨਣ ਬਲਿਆ ਜਮਕਾਲ ਦਾ ਛੂਪ ਨਹੀਂ ਸਕਦਾ ਉਹਦੇ ਬਲ ਝਾਕਦਾ ਸੂਰਜ ਬਲਜੇ ਬਲ ਸਾਤੇ ਝਾਕ ਨਹੀਂ ਹੁੰਦਾ ਕਹਿੰਦਾ ਮੈਂ ਤਾਂ ਦੇਖਿਆ ਹੀ ਨਹੀਂ ਹੈ ਤੇਰਾ ਕਿਥੇ ਕਹਿੰਦਾ ਜੀ ਮੈਨੂੰ ਸੂਰਜ ਤੋਂ ਬਚਾਓ ਇਹ ਮੈਨੂੰ ਨਹੀਂ ਕਰ ਟਿਕਣ ਦਿੰਦਾ ਉਹ ਨੂੰ ਪੁੱਛਿਆ ਕਹਿੰਦਾ ਮੈਂ ਤਾਂ ਕਦੇ ਦੇਖਿਆ ਨਹੀਂ ਤੇਰਾ ਕਿਥੇ ਮੈਂ ਤਾਂ ਜਾਣਦਾ ਹੀ ਨਹੀਂ ਤੇਰਾ ਕਿਥੇ ਜਮਕਾਲ ਇਹਨੂੰ ਪਰਨੇਸ ਅਗਿਆਨਤਾ ਦਾ ਇਹ ਤਾਂ ਜਦ ਅਗਿਆਨਤਾ ਫਲਾਉਣੇ ਵਾਲੇ ਨੇ ਤਾਂ ਉਹਨੂੰ ਝਾਕਦੇ ਵੀ ਨਹੀਂ ਫਿਰ ਜਦੋਂ ਭੁਤ ਪ੍ਰਗਟ ਹੁੰਦੇ ਨੇ ਨਾ ਇਹ ਚੁੱਪੇ ਹੋ ਜਾਂਦੇ ਨੇ ਫਿਰ ਜੀਭ ਆ ਲੈਂਦੇ ਨੇ ਫੇਰ ਬੋਲਦੇ ਜੋ ਨਾ ਸਕੀ ਕਾਲ ਦੇ ਜਾਲ ਚ ਫਸਾਉਣੇ ਹੋਏ ਜਿਹਨੂੰ 잡 ਕੇ ਆਇਆ ਹੋਇਆ ਅਸਲ ਦੇ ਨਹੀਂ ਆਦਮੀ ਪਰ 잡 ਕਾਲ ਐਸਾ ਲੁਕੀ ਹੋਈ ਕਿ ਜਿਹੜੀ ਆ ਸਭ ਲਈ ਦੇ ਇਹ ਤੋਂ ਇਹ ਤੋਂ ਸਾਫ਼ ਨਹੀਂ ਹੋ ਸਕਦੀ ਡੈਫੀਨੇਸ਼ਨ ਕਿਤੇ ਵੀ ਜਮਕਾਲ ਦੀ ਜਮਕਾਲ ਦਾ ਨਾਮ ਜਮਕਾਲ ਹੈ ਹਨੇਰਾ ਘਟ ਬਲਿਆ ਉਹੀ ਗੱਲ ਹੈ ਨਾ ਜੀ ਤੇ ਚਾਨਣ ਹੋ ਬਲਿਆ ਠੀਕ ਹੈ ਜੀ ਨਾਨਕ ਬਖਸ਼ ਮਿਲਾਇਆ ਨਾ ਫਿਰ ਗਰਭ ਨਾ ਗਲਿਆ ਜਦ ਕਹਿੰਦਾ ਪਿਛਲੇ ਜਿਹੜੇ ਬਖਸ਼ ਤੇ ਦੇ ਮਾਰਗ ਪਾਤਾ ਬਿਜਾਏ ਗੱਲ ਹੁਰਦੂ ਸਾਡੇ ਚਲਾ ਬਖਸ਼ ਬੁਲਾਇਆ ਫਿਰ ਗਰਭ ਦੁਆਰੇ ਆਇਆ ਫਿਰ ਉਹ ਗਲਪ ਦੇ ਵਿੱਚ ਆਇਆ ਇਹਦੀ ਦੁਆਰਾ ਫਿਰ ਹੰਕਾਰ ਦੇ ਵਿੱਚ ਉਹਦੇ ਗੁਲਦੀ ਗਲੇ ਐ ਹੋ ਹੰਕਾਰ ਦੇ ਵਿੱਚ ਗੁਲਦੀ ਗਲੇ ਆ ਸੰਸਾਰ ਚ ਆ ਕੇ ਗਰਭ ਜੁਦੀਓ ਚ ਨਹੀਂ ਆਇਆ ਹਾਂਜੀ ਠੀਕ ਹੈ ਜੀ ਇੱਥੇ 20ਵੀਂ ਪੌੜੀ ਦੀ ਸਮਾਪਤੀ ਹੈ ਜੀ